ਸ਼ਲੋਕ ਮਹਲਾ ਪੰਜਵਾਂ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਤਿਸੈ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ ਵੱਤ ਲੱਗੀ ਸੱਚੇ ਨਾਮ ਕੀ ਸੱਚੇ ਨਾਮ ਦੀ ਵੱਤ ਲਾਗੀ ਵੱਤ ਹੋਤੀ ਆ ਸਮਾ ਆ ਗਿਆ ਹੈਗੀ ਐ ਜਿਹਦੇ ਕਿ ਲੋਕ ਵਿੱਦਿਆ ਜਾ ਸਕਦਾ ਐ ਗਿਆਨ ਹੈਗਾ ਇੰਨਾ ਬੰਦ ਗਿੱਲਾ ਹੋ ਗਿਆ ਇੰਨਾ ਬੰਦ ਭਿੱਜ ਗਿਆ ਕਿ ਇਹਦੇ ਵਿੱਚ ਨਾ ਕੋਈ ਬੀਜਿਆ ਜਾ ਸਕਦਾ ਤੇ ਬੀਜੇ ਸੁਖ ਹੈ ਜੋ ਬੀਜੇ ਸੋ ਭਾਈ ਇਹਦਾ ਬੀਜੂ ਕਾ ਖਾਲੂਗਾ ਜਿਹੇ ਪ੍ਰਾਪਤ ਕਰਨ ਦਾ ਜਿਸਨੂੰ ਲਿਖਿਆ ਤੋ ਰੋਹ ਵੀ ਮਨ ਦੇ ਵਿੱਚ ਫੁੱਲਣਾ ਉੱਠਿਆ ਨਾ ਅੰਦਰੋਂ ਚਿਤਚੋਂ ਵੀ ਬੀਜ ਲੈ ਉਹ ਤੋ ਉੱਠਿਆ ਦਰਗਾਹ ਉੱਠਿਆ ਸਕਦਾ ਤੂੰ ਬੀਜਦਾ ਹੌਸਲੇ ਨਾਲੇ ਬੀਜਦਾ ਨਹੀਂ ਕਰਦਾ ਪਿਆ ਹੋ ਸੁਖ ਜੂ ਇਹ ਵੀ ਰਹੂ ਜਿਹੜਾ ਕੋਲ ਬੀਜ ਹੈ ਹਾਂਜੀ ਮਹਲਾ ਪੰਜਵਾਂ ਮੰਗਣਾ ਤਾ ਸਚ ਇੱਕ ਜਿਸ ਤੁਸ ਦੇਵੇ ਆਪ ਜਿਤ ਖਾਦੇ ਮੰਤਰੀਪਤੀਏ ਨਾਨਕ ਸਾਹਿਬ ਦਾਤ ਬੜਾ ਨਾਮ ਗੋਇਕ ਕਾ ਮੰਗੋ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ आप ਪਰਮੇਸ਼ਰ ਕੋਝੋ ਕੇ ਜੰਤਾ ਹੋਗੇ तो मिलता ही ਦੀ ਜਿੰਨਾ ਜਰ ਕੋਝ ਨਹੀਂ ਹੁੰਦਾ ਦੰਦਾ ਨਹੀਂ ਕੁਝ ਹੋਏ ਨਾਲ ਦਿੱਤੀ ਚੀਜੇ ਫਰਦੀ ਹੁੰਦੀ ਹੈ ਜੇ है। ਹੋਗੇ ਤਵੇ ਸੋ ਚੀਜ ਬਫਾ ਨਹੀਂ ਕਰਦੀ ਹੁੰਦੀ ਕੁਝ ਦੇਵੇ ਆਪ ਹਾਂਜੀ ਜਿਤ ਖਾਦੈ ਮਨ ਤ੍ਰਿਪਤੀ ਹੈ ਨਾਨਕ ਇਹ ਇਹ ਸੱਚ ਨਾਲ ਇਕ ਕਿਉਂ ਲਿਖਿਆ ਵੈਸੇ ਜੀ ਮੰਗਣਾ ਤਾਂ ਸੱਚ ਇੱਕ ਸਾਰੇ ਨੇ ਇੱਕ ਸੱਚ ਨਿਰਾਸ਼ ਆਰੀ ਹੈ ਦਾ ਸੱਚ ਇੱਕਰ ਸਾਰੀ ਸਚ ਬਹੁਤ ਹੈ ਹਰ ਆਪੇ ਇੱਕ ਰੰਗ ਆਪੇ ਗੌਰੰਤਿ ਤਿਥਿ ਦਾ ਸੱਚ ਜੋ ਅਗਾੜਾ ਵੀ ਸੱਚ ਹੈ ਇਤਨਾ ਆ ਗਿਆ ਸਭ ਪਰ ਪਾਈ ਹੈ ਮੈਨ ਨਾਲ ਆ ਕੇ ਕਾਹੀਏ ਵੀ ਸੱਚ ਹੈ ਉਹਨਾਂ ਦਾ ਸੱਚ ਹੈ ਨਬਦਿਆ ਸੱਚ ਵੀ ਪਰਮਾਸ਼ਾ ਸਰਕਾਰ ਜਪੜੀ ਆਪਣੀ ਹੈ ਹਰ ਆਪੇ ਇੱਕ ਰੰਗ ਹੈ ਆਪੇ ਗੁਰ ਜਿਹੜਾ ਇੱਕ ਰੰਗ ਸੱਚ ਹੈ ਉਹ ਤਾਂ ਨਾਦਾਰੀ ਹੈ ਸੱਚ ਜਿਹੜਾ ਹਮੇਸ਼ਾ ਰਹਿੰਦਾ ਉਹ ਸੱਚ ਹੈ ਸਾਰੀ ਸੱਚ ਹੈ ਪਰ ਹਮੇਸ਼ਾ ਨਹੀਂ ਰਹਦਾ ਸਾਰੀ ਸੱਚ ਤਾਂ ਹੈ ਸੰਸਾਰ ਜਮੀ ਕਿਉਂਕਿ ਆਪ ਆਪ ਸੱਚ ਕੀਆ ਸਭ ਸੱਚ ਆਪ ਸੱਚ ਹੈ ਉਹਨੇ ਜੋ ਕੀਤਾ ਉਹ ਵੀ ਸੱਚ ਹੈ संसार भी ਪਾਰਲੀਕ ਟਾਈਮ ਵਿੱਚ ਦੁਸ਼ਰ ਸਾਚਾ ਹੈ ਪਰ ਅਵੇਸ਼ਾ ਸੱਚ ਦੀਣ ਜਿਹੜਾ ਅਵੇਸ਼ਾ ਸੱਚ ਰਹੇ ਉਹ ਇੱਕ ਹੈ ਠੀਕ ਹੈ ਪੌੜੀ ਲਾਹਾ ਦੌਲਤ ਰਾਸ਼ੀ ਦੌਲਤ ਨੂੰ ਕਹਿੰਦੇ ਹਰ ਤਨ ਰੂਪੀ ਦੌਲਤ ਹੈ ਜਿਹਨਾਂ ਕੋਲ ਲਾਹ ਖਟ ਲਿਆ ਉਹਨਾਂ ਦੀ ਦੂਤੀਆ ਭੌਣਾ ਜਾਣਣੀ ਔਰ ਦੀ ਆਇਆ ਦੇ ਧਨ ਦੇ ਦੀ ਲੋੜ ਇਹਨਾਂ ਦੀ ਲੋੜ ਆ ਇਹਨਾਂ ਨੂੰ ਇਕੱਠੇ ਕਰਨਾ ਇਹਨਾਂ ਦਾ ਲਾਹ ਉਹ ਤਾਂ ਜਾਣਦੇ ਹੀ ਸੱਚੇ ਦੀ ਹੁੰਦੀ ਉਹਨਾਂ ਦੀ ਠੀਕਾ ਨੂੰ ਹੀ ਲੋੜ ਵੀ 40 ਗੋਲਦਵਾਰੇ 150 ਗੋਲਦਵਾਰੇ ਸਾਡੇ ਵੇਚ ਦੇ ਵਿੱਚ ਆ ਗਏ ਪਣਾ ਰਹਿਆ ਤੇ ਵਾਹੀ ਦੀ ਲਗੀ ਹੋਈ ਹੈ ਉਹ ਪੱਥਰ ਦੀ ਖਰਾਲਾ ਵੀ ਆਪਣੀ ਲਓਤੋਂ ਵੀ ਕੋ ਵਜੂਏ ਐ ਜਾਂ ਕੁਝ ਤੇ ਝੂਠੇ ਨੇ ਸਾਰੇ ਐ ਜੇ ਕਰਨ ਵਾਲੇ ਤੇ ਹੋਰ ਸਭ વિનાਸ਼ ਨਿਚਲ ਇਕਾ ਹੈ ਨਿਚਲ ਕੋਈ ਹੈ ਜਿਹੜਾ ਹੈ ਜਿਹਨੇ ਉਹਦਾ ਉਦੀ ਸੇਵਾ ਕਰ ਲਈ ਉਦੀ ਸੇਵਾ ਵੀ ਉਹਦੇ ਵਰਗੀ ਪੋਜੀਸ਼ਨ ਨਿਸ਼ਚਿਤ ਹੋ ਗਈ ਹੋ ਸਕਦੀ ਹੈ ਜਿੱਦ ਕੋਈ ਅਸਰ ਇਹ ਨੂੰ ਹੋਵੇ ਕਿਉਂਕਿ ਜਦ ਸਰੇਬਿਆ ਹੋਰ ਸਭ ਵਿਨਾਸ਼ ਉਹ ਸਭ ਨਾਸਵੰਤ ਹੈ ਠੀਕ ਜਿਸ ਵਿਸਤਰ ਵਿਰਥਾ ਸਾਥ ਪਾਰ ਬ੍ਰਹਮ ਵਿਸਤਰ ਗਿਆ ਜਿਹਦਾ ਉਹਦਾ ਸਾਥ ਵੀ ਵਿਰਥਾ ਕੰਠ ਲਾਇ ਜਨ ਰੱਖਿਆ ਨਾਨਕ ਬਲਜਾਸ ਕੰਠ ਲਾਇ ਜਨ ਰੱਖਿਆ ਨਾਨਕ ਬਲਜਾਸ ਕੰਠ ਲਾਉਣ ਦਾ ਮਤਲਬ ਗੱਲ ਲਾ ਕੇ ਨਹੀਂ ਨਾਮ ਲਾਤਾ ਉਹ ਉਚਾਰਨ ਕਰਦਾ ਹੈ ਬੋਲਦਾ ਹੈ ਜਦੋਂ ਠੀਕ ਹੈ ਜੀ ਜਾਂ ਭਰ ਗਿਆ ਗਲਾ ਕੰਡ ਤੱਕ ਭਰ ਹੁਣ ਬਾਹਰ ਨੂੰ ਲਾਇ ਜਨ ਰੱਖਿਆ ਜਾਂਦੇ ਕੰਢਾ ਨੂੰ ਲਾਇਆ ਨਾਨਕ ਬਲਜਾ ਬਲਜਾ ਢੱਕ ਲਿਆ ਨੀ ਉਲਟੀ ਵਰੂਗਾ ਇਹ ਜਿਹਨੇ ਕੰਢਾ ਲੱਗਿਆ ਉਲਟੀ ਵਰਦਾ ਤੇ ਕਿਆ ਹੋ ਗਈ ਉਹਦੀ ਠੀਕ ਹੈ ਬਲਿਆਰੀ